ਸ਼ਲੋਕ ਮਹੱਲਾ 5ਵਾਂ ਦੂਜਾ ਤਿਸਨਾ ਬੁਝਾਇਓ ਫਾਰ ਨਾਮ ਦੇ ਆਧਾਰ ਅਗੰ ਅਗੋਚਰ ਸਾਹਿਬੋ ਸਮਰੱਥ ਸੱਚ ਦਾ ਨਾਮ ਦਾ ਆਧਾਰ ਨੇ ਦੇਤਾ ਮਾਇਆ ਦੀ ਕਹਾ ਲਉਦੇ ਜੇ ਮਾਇਆ ਦਾ ਵਿਸਰ ਗਈ ਵਿਸਰ ਗਈ ਸਭ ਸਾਤ ਫਰਾਈ ਸੀ ਮਾਇਆ ਫਰਾਈ ਹੈ ਮਾਇਆ ਆਪਣੀ ਤਾਂ ਮਾਇਆ ਪਰਾਇਤੀ ਦੀ ਦਸੜੀ ਉਹਦੇ ਬੰਦਦਾ ਉਹਦਾ ਧਿਆਨ ਹੀ ਗਿਆ ਧਿਆਨ ਜਾਣੇ ਨਹੀਂ ਦਿੱਤਾ ਪਰ ਬ੍ਰਹਮਦਾਤਾ ਰਹੇ ਆ ਕੰਮਾ ਗੋਚਰ ਸਾਹ ਕੋ ਉਹ ਸਾਹੇ ਦਾ ਕੰਮਾ ਗੋਚਰੇ ਸੁਭਰਾਤ ਦਾਤਾਰ ਸੁਭਰਾਤ ਸੱਚ ਸਦਾ ਫਿਰ ਰਹਿਣ ਵਾਲਾ ਉਹ ਉਹ ਦੇ ਸਕਦਾ ਸੱਚ ਉਹਦੇ ਕੋਲ ਉਹ ਆਪੇ ਸੱਚ ਦੇ ਸਕਦਾ ਉਹ ਆਪ ਉਹਦੇ ਕੋਲ ਹੈ ਦੂਜਾ ਤਾਂ ਵਿਸਰੇ ਜਾਂਦਾ ਨਾ ਸਿਆ ਪਰਬ੍ਰह्म ਨਾਮ ਦੇ ਆਧਾਰ ਹੈ ਪਰਬ੍ਰह्म ਤੋਂ ਫਿਰ ਨਾਮ ਪਦਾਰਥ ਮਿਲਦਾ ਜੀ ਹਾਂ ਪਦਾਰਥ ਮਾਇਆ ਚਿੱਤ ਜਿੱਥੇ ਮੁੜ ਕੇ ਮਾਇਆ ਦਾ ਚੇਤਾ ਠੀਕ ਹੈ ਜੀ ਇਹ ਗਿਆਨ ਪਦਾਰਥ ਦੀ ਗੱਲ ਨਹੀਂ ਹੋ ਰਹੀ ਨਾਮ ਪਦਾਰਥ ਦੀ ਗੱਲ ਹੈ ਜੀ ਹਾਂ ਨਾਮ ਪਦਾਰਥ ਦੀ ਗੱਲ ਹੈ ਠੀਕ ਹੈ ਜੀ ਕਿਉਂਕਿ ਪਰਬ੍ਰह्म ਤੋਂ ਉਹਦਾ ਨਾਮ ਪਦਾਰਥ ਮਿਲਦਾ ਅ ਗਿਆਨ ਦਾ ਮਾਇਆ ਨੂੰ ਛੱਡਣ ਵਾਸਤੇ ਹੁੰਦਾ ਹੈ ਜਉ ਇੱਕ ਪਾਸੇ ਮਾਇਆ ਹੈ ਇੱਕ ਪਾਸੇ ਗਿਆਨ ਹੈ ਇਹਨੂੰ ਛੱਡਦੇ ਛੱਡਦੇ ਛੱਡਦੇ ਉਹ ਤਾਂ ਕੀਮਤ ਕਹਿਣ ਨਾ ਜਾਈਐ ਅੰਤ ਨ ਪਾਰਾ ਵਾਰ ਉਹ ਨੇਕਿਆ ਲੈ ਇੱਕ ਦਾ ਕੋਲ ਲੈ ਦੇਰਵੈਰੇ ਮੈਦਕ੍ਰੋਤ ਪਰੇ ਸੱਚੇ ਵੇਰ ਤੂੰ ਸਦਾ ਖੜ੍ਹਣ ਵਾਲਾ ਸੱਚਾ ਦਰਬਾਰ ਤੇਰਾ ਦਰਬਾਰ ਵੀ ਸੱਚਾ ਉੱਥੇ ਕੋਈ ਝੂਠਾ ਨਾ ਦਾ ਝੂਠੇ ਦੀ ਐਂਟਰੀ ਨਹੀਂ ਹੁੰਦੀ ਉੱਥੇ ਕਿਹੜੇ ਦਰਬਾਰ ਸਾਹਿਬ ਸੱਚਾ ਰੇਟੇ ਸਾਰੇ ਭਗਤ ਜੀ ਝੂਠੇ ਦੀ ਐਂਟਰੀ ਨਹੀਂ ਹਈ ਨਹੀਂ ਕੀਮਤ ਕਹਿ ਨਾ ਜਾਈ ਹੈ ਉੱਥੇ ਦੀ ਕੀਮਤ ਨਹੀਂ ਕਹੀ ਜਾ ਸਕਦੀ ਉੱਥੇ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਬਿਆਨ ਤੋਂ ਪਰੇ ਹੈ ਉਹ ਦਰਬਾਰ ਤੇਰਾ ਹੰਤਨ ਬਾਰਾ ਬਾਰ ਪਰ ਸਹੀ ਕਹਿ ਸਕਦੇ ਹਾਂ ਉਹਦੇ ਬਾਰੇ ਹੰਤਨ ਬਾਰਾ ਬਾਰ ਕੋਰਾ ਕੋਈ ਹੰਤ ਬਾਰਾ ਬਾਰ ਨਹੀਂ ਸਾਡੇ ਅੰਦਾਜ਼ਿਆਂ ਤੋਂ तो ਅਕਲ ਤੋਂ ਪਰੇ ਦੀ ਗੱਲ ਹੈ ਜੀ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚਾ ਛਾਹ ਸੇ ਜਿਨ ਸੱਚਾ ਵਿਵਹਾਰ ਪ੍ਰਭ ਨੂੰ ਛੱਡ ਕੇ ਆਪਣੇ ਮੂਲ ਨੂੰ ਛੱਡ ਕੇ ਜੇ ਕੋਈ ਉਹਦੀ ਸੰਗਤ ਮੰਗਦੀ ਹੋਰ ਜੇ ਨੁਰਨਾ ਹੋਰ ਕੀ ਹੈ ਉਹਦਾ ਸਭ ਵਿਖਿਆ ਹੈ ਛਾਰ ਹੈ ਸਵਾਏ ਹੋਰ ਦਾ ਨਾਸਵੰਤ ਹੈ ਸਭ ਕੁਝ ਛੇ ਸੁਖੀਏ ਸੱਚਾ ਛਾ ਸੇ ਕੋਈ ਸੁਖੀਏ ने ਉਹੀ ਸੱਚੇ ਛਾ ਨੇ ਇੰਨਾ ਸੱਚਾ ਵਿਵਹਾਰ ਜਿਹਨਾਂ ਦਾ ਵਿਵਹਾਰ ਸੱਚਾ ਸੱਚਾ ਹੈ ਸੱਚ ਵੜਦੇ ਨੇ ਸੱਚ ਪ੍ਰਾਪਤ ਕਰਦੇ ਨੇ ਸੱਚੇ ਲੈਂਦੇ ਨੇ ਸੱਚੇ ਦੁੱਤੇ ਨੇ ਝੂਠ ਖਰੀਦੇ ਨਹੀਂ ਝੂਠ ਵੜਦੇ ਚੂੜਦਾ ਬਪਾਲ ਦੀ ਗੱਲ ਦੇ ਬਪਾਲ ਸੱਚ ਦਾ ਕਰਦੇ ਹਾਂਜੀ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇੱਕ ਆਰਾਧੇ ਸੰਤਨ ਰੇਣਾਰ ਜਿਹਨਾਂ ਦੀ ਪ੍ਰਭ ਨਾਲ ਪ੍ਰੀਤ ਨਾਮ ਸਹਿਜ ਸੁਖ ਸਾਰ ਉਹਨਾਂ ਨੂੰ ਨਾਮ ਮਿਲ ਜਾਂਦਾ ਹੈ ਸਾਹਿਜ ਮਿਲ ਜਾਂਦਾ ਹੈ ਸੁਖ ਵੀ ਮਿਲ ਜਾਂਦਾ ਹੈ ਸਾਹਿਜ ਦੇ ਨਾਲ ਸੁਖ ਮਿਲਦਾ ਵੰਟੇ ਗਿਆ ਸੁਖ ਹੋ ਗਿਆ ਵੰਦੇ ਟਿਗੜ ਨਾਲ ਸਹਿਜ ਹੋਣ ਨਾਲ ਸੁਖ ਸਾਰ ਸੁਖ ਮਿਲਦਾ ਅਸਲੀ ਸੁਖ ਮਿਲਦਾ ਸਾਰ ਸੁਖ ਸਾਰੇ ਸੁਖਾਂ ਦਾ ਸਾਰ ਸੁਖ ਮਿਲਦਾ ਨਾਨਕ ਨਾਨਕ ਨੇ ਇੱਕ ਜੀ ਨਾ ਕੀਤੀ ਹੈ ਇਹ ਕਰਾਂ ਦਾ ਸੰਤ ਜਨਾ ਦੀ ਰਹਿਣਾਰ ਬੜ ਜਾਂਦਾ ਆਪੇ ਰਹਿਣ ਬੜ ਜਾਂਦਾ ਸੰਤ ਜਨੋ ਜ਼ਰ ਤਲ ਕੀ ਰੇੜ ਪਿਆਰੇ ਹਾਂ ਸੰਤ ਤਕੀ ਸਰਣ ਦਾ ਜਦ ਉਹਨਾਂ ਦੀ ਰੇੜੇ ਬਣ ਜਾਂਦਾ ਇਹ ਹੁਣ ਆराधना ਵੀ ਨਾਮ ਗੱਲ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਮਹੱਲਾ ਸੂਖ ਵਿਸ਼ਰਾਮ ਨਿਤ ਹਰਕਾ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇਹ ਨਾਨਕ ਉਪਰ ਸਨਾਈ ਆਨੰਦ ਸੂਖ ਵਿਸ਼ਰਾਮ ਨਿਤ ਹਰਿ ਕੀਰਤਨ ਗਾਏ ਇਹ ਹਰ ਕੀਰਤਨ ਗਾਏ ਤਾਂ ਕੀ ਹੁੰਦਾ ਨਿਟ ਆਨੰਦ ਹੁੰਦਾ ਸੁਖ ਹੁੰਦਾ ਟਿਕਾਉ ਹੁੰਦਾ ਬਿਸ਼ਰਾਮ ਹੁੰਦਾ ਹਰ ਵਕਤ ਆਨੰਦ ਬਣਿਆ ਰਹਿੰਦਾ ਟਿਕਾਉ ਬਣਿਆ ਰਹਿੰਦਾ ਇਹ ਹਰ ਕਾ ਕੀਰਤਨ ਗਾਈਏ ਇਹ ਕੀਰਤਨ ਗਾਈਏ ਆ ਆਵਸਥਾ ਨਾ ਹੋਵੇ ਤਾਂ ਕੀਰਤਨ ਦੀ ਕੋਈ ਗੱਲ ਤੇ ਕੋਹਰੇ ਕਰਦੇ ਨੇ ਕੀਰਤਨ ਦਾ ਤੇ ਆਪਰਾਪੇ ਪ੍ਰਾਪਤੀ ਨਹੀਂ ਤਾਂ ਕੀਰਤਨ ਨਹੀਂ ਗਾਇਆ ਐਵੇਂ ਕਹਿਣੇ ਨੇ ਕੀਰਤਨ ਕੀਰਤਨ ਕੀਰਤਨ ਨਹੀਂ ਗਾਇਆ ਕੀਰਤਨ ਕਿਹਾ ਜਾ ਸਕਦਾ ਰਿਜ਼ਲਟ ਨਹੀਂ ਆਇਆ ਕਿਸ ਨਾਲੇ ਜੇ ਕੀਰਤਨ ਵਾਲੇ ਰਿਜ਼ਲਟ ਆਏ ਨੇ ਤਾਂ ਕੀਰਤਨ ਦੇ ਨਾਨਕ ਉਪਰਸ ਨਾਹੀਂ ਹੋਰ ਸਾਰੀਆਂ ਸਿਆਣਪਾਂ ਛੱਡ ਦੇ ਦੇ ਪਖੰਡਾ ਨਾ ਕਰ ਮੇਰੇ ਆ ਕੱਖ ਦੀ ਅੰਦਰ ਸ਼ਾਂਤੀ ਨਹੀਂ ਵੰਟ ਗਿਆ ਨਹੀਂ ਕਹਿੰਦਾ ਮੈਂ ਕੀਰਤਨ ਕਰਕੇ ਆਇਆ ਕੀਰਤਨ ਕਰਦਾ ਸੀ ਨਾਨਕ ਉਦਰਸ ਨਾਹੀਂ ਤੇ ਬਿਨਾ ਹੋਂਦ ਨਹੀਂ ਹੋਣਾ ਨਾਮ ਤੇ ਬਿਨਾ ਫਨ ਟਿਕਣਾ ਨਹੀਂ ਇਹ नाम ਪ੍ਰਧਾਨ है ਤਾਂ ਕੀਰਤਨ ਹੈ ਜੇ ਨਾਮ ਦਾ ਗਿਆਨ ਇਹ ਨਹੀਂ ਮਿਲਦਾ ਹੀ ਨਹੀਂ ਕੀਰਤਨ ਦਾ ਕੀਰਤਨ ਤੋਂ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾਮ ਦੀ ਪ੍ਰਾਪਤੀ ਨਹੀਂ ਕੀਰਤਨ ਹੈ ਦੀ ਕੀਰਤਨ ਵਿੱਚ ਨਾਮ ਵੰਡਿਆ ਜਾਂਦਾ ਹੈ ਨਾਮ ਪ੍ਰਾਪਤ ਹੁੰਦਾ ਹੈ ਹਾਂ ਜੀ ਪੌੜੀ ਨਾ ਤੂੰ ਉਰੇ ਪਾਸੇ ਲਾਈ ਪਈ ਆ ਕੋੜੀਏ ਤੈਨੂੰ ਬੁੱਧੀ ਕਹਿੰਦੀ ਆ ਨਾਲ ਤੋਂ ਆਮ ਐ ਵਸ ਤੇ ਬਹੁਤ ਕੜਾਵਣੇ ਤੈਨੂੰ ਕਿੰਨਾ ਗੁਰਾ ਭਲਾ ਕਹਨੀਏ ਕਿੰਨੀਆਂ ਤੈਨੂੰ ਲਾਣ ਦਾ ਲਈਏ ਤੂੰ ਬਾਛੀ ਨਹੀਂ ਹੁੰਦਾ ਆ ਪੁਣਕਾਲੇ ਕਿੰਨੀ ਛੇਤਰ ਪ੍ਰੇਡ ਕਰਦੇ ਨੇ ਕਿੰਨਾ ਕੁਝ ਕਰਦੇ ਨੇ ਆਸਲ ਬਾਸ ਚਾਉਂਦੀ ਖੋਟੇ ਆਦਮੀ ਘੋਟ ਤੋਂ ਖੋਟਾ ਛੱਡਦੇ ਹੀ ਦੀ ਬਥੇਰਾ ਦੁਨੀਆਂ ਦੇ ਵਿੱਚ ਔਖੀ ਤੋਂ ਔਖੀ ਸਜਾਵਾਂ ਕੀਤੀਆਂ ਹੋਈਆਂ ਨੇ ਕਿ ਤੇ ਮਨ ਬਧੀ ਕਰਦੇ ਹਰਦਾ ਬਾਦ ਜਿਹੜੇ ਨੇ ਵਧੀ ਕਰਨ ਤੇ ਨਹੀਂ ਹਟਦੇ ਨਾ ਤੂੰ ਆਵੇਂ ਵਸ ਬਹੁਤ ਕਣਾਵਣ ਤੈਨੂੰ ਬਥੇਰੀ ਕਣਾਵਣੇ ਕਣਾ ਕਰਨੀ ਬਹੁਤ ਬੁਰਾ ਭਲਾ ਕਹਿ ਲਿਆ ਖੋਟੇ ਵਚਨ ਕਹਿ ਲਏ ਤੈਨੂੰ ਗਦਾ ਖੋਤਾ ਕੋ ਕਹਿ ਲਿਆ ਅਨਾ ਕਹਿ ਲਿਆ ਭੋੜਾ ਕਹਿ ਲਿਆ ਬਹੁਤ ਕੁਛ ਕਹਿ ਲਿਆ ਗੁਰਬਾਨੀ ਤੂੰ ਵਾਚ ਨਹੀਂ ਆਇਆ ਇੱਕ ਨਹੀਂ ਲੱਗੀ ਤੈਨੂੰ ਇੱਕ ਨਹੀਂ ਸ਼ਰਮ ਆਈ ਜੀ ਮੈਨੂੰ ਕੀ ਕਹੇ ਮੈਂ ਛੱਡ ਦਵਾਂ ਹਾਂ ਜੀ ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ ਫੇ ਤੇਨੂੰ ਉਹ ਤੋਂ ਬਾਅਦ ਪੜ੍ਹਾਵਣੇ ਛੱਡ ਕੇ ਵੇਦ ਪੜ੍ਹਾਏ ਗਿਆਨ ਪੜ੍ਹਾਏ ਉਹਦੇ ਨਾਲ ਨਹੀਂ ਟਿਕਿਆ ਤੇਨੂੰ ਟਿਕਾ ਨਹੀਂ ਆਇਆ ਵੇਦ ਪੜ੍ਹਾਉਣ ਤੇ ਵੀ ਨਹੀਂ ਆਇਆ ਆਂ ਬੁਰਾ ਭਲਾ ਛੇਤਰ ਪ੍ਰੇੜ ਕੀਤੀ ਤਾਂ ਨਹੀਂ ਆਇਆ ਬੰਦੀ ਕਤੇਰੀਆਂ ਬੁੱਢੀਆਂ ਲਈ ਫਿਰਦੀਆਂ ਆਪਣੇ ਆਪਣੇ ਮੰਦੂ ਮੇਰਾ ਮਨਵਾਸ ਚਾਜਵੇ ਤੀਰਥ ਘੁੰਮਦੇ ਫਿਰਦੇ ਨੇ ਜੋਗੀ ਇਹੀ ਕੰਮ ਜੋ ਲੱਗੇ ਨੇ ਤੀਰਥ ਨਹੀਂ ਬਸ ਆਉਂਦਾ ਤੀਰਥ ਕਰਕੇ ਉਹਨਾਂ ਵਸ ਨਹੀਂ ਆਉਂਦਾ ਨਾ ਤਾਂ ਆਵੇਂ ਵਸ ਧਰਤੀ ਢਾਈ ਹੈ ਧਰਤੀ ਤੇ ਭਜੇ ਫਿਰੋ ਧਰਤੀ ਨੂੰ ਨੱਬਦੇ ਤੁਰੇ ਫਿਰੋ ਦੂਰ ਦੂਰ ਟੱਕ ਬੰਦ ਵਸ ਨਹੀਂ ਹੋ ਧਰਮਕਸਥਾਨਾਂ ਦੀ ਗੱਲ ਹੈ ਵੀ ਜਿੱਥੇ ਮਰਜੀ ਧਰਮਕਸਥਾਨਾਂ ਦੇ ਫਿਰੋ ਦੇ ਫਿਰਦੇ ਨੇ ਹੋਰ ਵੀ ਬਥੇਰੇ ਹਨ ਅਗਰਾ ਵੀ ਫਿਰਦੇ ਦੇ ਦੇ ਜੇ ਦੇ ਕੋਲ ਨਾਲ ਕਹਿੰਦੇ ਗਿਆਨ ਹੋ ਜਾਂਦਾ ਉਹ ਗਿਆਨ ਨਾਲ ਬਨਵਾਸ ਨਹੀਂ ਹੁੰਦਾ ਕਹਿਣਾ ਹੁੰਦਾ ਹੈ ਗਿਆਨ ਜ਼ਰੂਰ ਹੁੰਦਾ ਹੈ ਦੇਸ਼ ਵਿਦੇਸ਼ ਫਿਰਦਾ ਪਰ ਉਹ ਗਿਆਨ ਬਨਵਾਸ ਕਰਦੇ ਹੈ ਜੀ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਨਾ ਤੂੰ ਆਵੇਂ ਵਸ ਬਹੁਤਾ দান ਦੇ ਜਿਹੜੇ ਵਸ ਗਿਆਨ ਕਰ ਲੀਏ بڑے ਸਿਆਣੇ ਦੇ ਗਿਆਨ ਸਿੱਖਦੇ ਨੇ ਬਹੁਤ ਛਕ ਕਰ ਲੈਂਦੇ ਨੇ ਪਰ ਮੰਨ ਲਈ ਉਹਨਾਂ ਦਾ ਆਪਣਾ ਬੱਚਾ ਉਹਦਾ ਕੂਤਾ ਤੋਂ ਕੁਝ ਚਾਂਚ ਪਾ ਲੈਂਦੇ ਨੇ ਆਪਣਾ ਹਣ ਕੁਝ ਚਾਂਚ ਪਾ ਕੇ ਦਿਖਾਉਣ। ਸ਼ੈਤਾਨ ਨੂੰ। ਸ਼ੈਤਾਨ ਦਾ ਬਹਾਨਾ ਪਾਇਆ ਨਹੀਂ। ਉਹ ਪਖੰਡ ਕਰੀ ਜਾਂਦੇ ਨੇ ਲੈ ਜੀ ਆਇਆ ਫਿਰ ਇਹ ਕੁਝ ਚਾਂਚ ਦੇ ਦਬਤਾ। ਮੰਨੂਏ ਦੇ ਆਪਣੇ ਨੂੰ ਕੁਝ ਚਾਂਚ ਪਾ ਕੇ ਫਿਰ ਅਸੀਂ ਸਮਝੀਏ ਵੀ ਤੂੰ ਕੁਝ ਚਾਂਚ ਪਾਉਣ ਦੀ ਸਮਰੱਥਾ ਰੱਖਦਾ ਹੈ। ਨਾ ਤੂੰ ਅਮੇ ਵਸ ਬਹੁਤਾ দান ਦੇ। ਬਹੁਤਾ দান ਦੇ ਕੇ ਦੇਖ ਲੈ ਅਬ ਤੇਰਾ ਬਸ ਨਹੀਂ ਉਹ ਜਿਹੜਾ ਮਰਜੀ ਨਾਮ ਦੇ ਲੈ ਗਾਣ ਦੇਣ ਵਾਲੇ ਦਾ ਮਨ ਵੀ ਵਸਦੀ ਕਹਿੰਦੇ ਅੱਜ ਤੱਕ ਕਿਹਦਾ ਵਸਦੀ ਹੈ ਹਾਂਜੀ ਸਭ ਕੋ ਤੇਰੇ ਤੇਰਾ ਅਸ ਜੀ ਨਾ ਤੇਰੇ ਵਾ ਚਾਹ ਤੂੰ ਚਾਹੇ ਇਧਰ ਚਾਹੇ ਇਧਰ ਰੱਖ ਇਧਰ ਰੱਖ ਆ શરીર ਤੇਰੇ ਵਸੋ ਚ ਤੂੰ ਚਾਹਨਾ ਸਭ ਕੋ ਤੇਰੇ ਵਸ ਰਹੇ ਅਗਾਂ ਗੰਗੋਚਰਾ ਮਾਨਵੀਯ ਗੰਗੋਚਰਾ ਗੰਗੋਚਰਕੇ ਤੇ ਪਰੇਸ਼ੀਅ ਦੁਦੀ ਕੀ ਆਇਆ ਬੁੱਧੀ ਦੀ ਪਗੜ ਤੋਂ ਪਰੇ ਅਬ ਬੜੇ ਬੜੇ ਆਨੇ ਆਪਣਾ ਮੰਦੀ ਖੋਜਿਆ ਤੇ ਖੋਜ ਲੈਣ ਨੇ ਹਸਪਤਾਲ ਵਿੱਚੋਂ ਮੰਦੀ ਖੋਜਿਆ ਕੋਲ ਸਕੇ ਮੰਨੂ ਸਮਝ ਨਹੀਂ ਸਕੇ ਪਰ ਕੀ ਇਹਨੂੰ ਦੇਖ ਨਹੀਂ ਸਕੇ ਜਾਂ ਦੇਖਿਆ ਹੀ ਨਹੀਂ ਕਿਸੇ ਨੇ ਬੁੱਧੂ ਤੇ ਗੰਗੋਚਰੇ ਹੀ ਹੋਣਗੇ ਸਭ ਕੁਝ ਤੇਰੇ ਵਾਸਤੇ ਸਾਰੀ ਹਰ ਬੁੱਧੀ ਤੇਰੇ ਵਾਸਤੇ ਵਿੱਚ ਗੁਰਮੁਖੀ ਬੁੱਧੀ ਤੋਂ ਬਿਨਾ ਹਰ ਕਿਸਮ ਦੀ ਤੇਰੇ ਵੱਸੂ ਛੇ ਮਗਰ ਤੇ ਸੁਭਾਅ ਦੇ ਵਗੈਰਾ ਹਰ ਕੋਈ ਸਵਾਇ ਗੁਰਮੁਖੀ ਤੇ ਸਵਾਇ ਤੋਂ ਰੱਤੇ ਆਪਣਾ ਕੋਚਰਾ ਤੂੰ ਭਗਤਾ ਕੇ ਵੱਸ ਪਰ ਤੂੰ ਭਕਤਾਂ ਨੇ ਜੂਰ ਵੱਸਾਏ ਭਗਤਾ ਨੇ ਤੇ ਤੂੰ ਕੀਤਾ ਬਗੈਰ ਬੁੱਧੀ ਨੇ ਤੇ ਤੂੰ ਵੱਸ ਕਾਲਿਆ ਤੂੰ ਭਗਤਾ ਕੇ ਵੱਸ ਭਗਤਾਂ ਤੋਂ ਭਗਤ ਤੇਰੀ ਸ਼ਰਤਿਓ ਵਿੱਚ ਲੈ ਲੈਂਦੇ ਨੇ ਸਬਰ ਤਾਰਕ ਲੈ ਲੈਂਦੇ ਨੇ ਤੇ ਤੂੰ ਤੇਰੀ ਸ਼ਰਤਿ ਭਗਤ ਖਿੱਚ ਨੇ ਤੈਨੂੰ ਆਪਣੇ ਮੂਰਤ ਤੋਂ ਸ਼ੰਤੀ ਮਿਲਦੀ ਤੇਜ ਜਬਦੀ ਤੋਂ ਜਿਉਂ ਦੇੜੂ ਮਾਰ ਦਿੰਦੇ ਨੇ ਤਾਂ ਬਸ ਵਿੱਚ ਹਾਂਜੀ ਇਸ ਬੋੜੀ ਦਾ ਭਲੇਖਾ ਆਪ ਪੈਂਦਾ ਕਿ ਵਾਸਤੇ ਉਚਾਰੀ ਹੋਈ ਹੈ ਕਿਨੇ ਪੜਾਏ ਨੇ ਇਸ ਨੂੰ ਪਲੇਖਾ ਖਾ ਜਾਣੇ ਕਿ ਪਰਮੇਸ਼ਰ ਨੂੰ ਵੇਦ ਪੜਾਉਣ ਦੀ ਲੋੜ ਨਹੀਂ ਹੈ ਵੇਦ ਤਾਂ ਮਨ ਨੂੰ ਹੀ ਪੜਾਉਣੇ ਸੀ ਆ ਰੱਬ ਕੋਚ ਨਾ ਤੇ ਆ ਗਿਆ ਪਲੇਖਾ ਖਾਣੇ ਨੇ ਉਹ ਜਿੱਥੇ ਇਸ ਤਰ੍ਹਾਂ ਹੀ ਹੈ ਪਰ ਹੈ ਬੰਦ ਕੋ ਉਹ ਹੀ ਘੜਾ ਰੂਪ ਦੇ ਖਿਲਾਫ ਤੇ ਜੋ ਜਾਖ ਹੈ ਇੱਕ ਵਾਸੇ ਹੈ ਛੋਟੀ ਸ਼ਕਤੀ ਕਿਤੇ ਹੈ ਮਨ ਜੀਤ ਤੇ ਜਗ ਜੀਤ ਹੈ ਜੋੜੀ ਜਗਦੀ ਹੈ ਸਾਰਾ ਜਗ ਜੀ ਨੇ ਜਿੱਤਣਾ ਬੰਦੇ ਤਲ ਠੀਕ ਹੈ ਜੀ